ਅਸਟੋਵੀਂ ਕਈ ਕੋਟ ਹੋਏ ਪੁਜਾਰੀ ਕਈ ਕੋਟ ਵਿਚਾਰ ਵਿਵਹਾਰੀ ਮੇਰੀ ਇੱਕ ਪ੍ਰਕਾਰ ਦੀ ਰਚਨਾ ਉਹਨਾਂ ਦੀ ਡਿਟੇਲ ਆ ਹਾਨਕ ਉਪਰਕਾਰ ਦੀ ਜੀ ਹੋਏ ਪੁਜਾਰੀ ਸਿਰਫ ਉਹਨਾਂ ਦੀਆਂ ਰਚਨਾ ਜਿਹੜੇ ਧਾਰਮਿਕ ਬੰਦੇ ਨੇ ਉਹਨਾਂ ਦੀ ਗੱਲ ਕਈ ਕੋਟ ਹੋਏ ਪੁਜਾਰੀ ਕਈ ਪਾਰ ਜਗਾ ਨੇ ਜਿਹੜਾ ਜ਼ਿਲ੍ਹਾ ਖਡੂਰਚ ਆਦਮੀ ਦੇ ਅੱਗੇ ਲੈਣ ਮਿਲਣ ਉਹ ਤੋਂ ਕਰਾਉਣ ਆਬੀਦ ਨੇ ਕਿਹਾ ਬਤਾ ਜਿੱਤਿਆਂ ਜੂਨਾ ਦੇ ਵਿੱਚ ਬਾਕੀ ਅਸੀਂ ਜੂਨਾ ਜਿੱਤਿਆਂ ਵੀ ਅਸੀਂ ਬਾਕੀ ਉਤਰੀਆਂ ਦੇ ਅੱਗੇ ਪੂਜਾ ਦੇ ਵਿੱਚ ਕੀ ਚੜਾਇਆ ਤਨਮਨ ਅਰਕੋਂ ਪੂਜਰਾਂ ਪਾਣੀ ਜਰ ਹੈ ਜਿਹੜਾ ਤੋਂ ਬੱਡੇ ਆ ਜਾਂਦਾ ਉਹਦੇ ਹੁਕਮ ਨਾਲ ਕੰਮ ਆਉਂਦਾ ਉਹਦੇ ਬੱਡੇ ਆਉਂਦੇ ਉਹਦੇ ਕੰਮ ਆਉਂਦਾ ਉਹ ਜਦੋਂ ਪੜਾਉਂਦਾ ਹੈ ਜੇ ਉਹ ਪੜਾਉਦਾ ਜਿਉਣਾ ਕਰਨਾ ਕਿਹਦੀ ਲੋੜ ਪੂਰੀ ਕਰਦੀ ਹੈ ਉਹ ਆਪਣੀ ਤਨਜੀਦ ਕਰਦਾ ਖਾਣਾ ਉਹ ਛੱਡਦਾ ਹੈ ਆ ਤੱਕਦਾ ਹੈ ਉਹਦੀ ਗੁਜ਼ਰੀ ਦੀ ਕਿਹਦਾ ਯੂਨ ਕਿੱਥੇ ਕਰਨਾ ਜਿੱਥੇ ਇਹ ਪਤਾ ਆਪਰੇ ਹੋ ਜਾਂਦਾ ਹੋਰ ਵੀ ਜੰਮ ਨੇ ਜਿਹੜੇ ਜੀਵਨ ਜੀ ਖਾਂਦੇ ਨੇ ਆਹਾਰ ਉਹਦੇ ਦਿੱਤਾ ਜੋ ਜੀ ਦਾ ਜੀ ਖਾ ਗਿਆ ਉਹਨੇ ਆਪਣਾ ਤਲਵਾਰ ਅਰਪੂ ਪੂਛੜਾ ਤੱਤ ਹੋਕ ਮੋਦਾ ਜੀ ਦਾ ਉਹ ਉਹ ਉਹਦੇ ਜੀ ਦਾ ਆਹਰ ਬੰਦ ਤਲਵਾਰ ਅਰਪੂ ਪੂਛੜਾ ਉਭੋ ਗਿਆ ਸਾਰੀ ਨਾਲ ਜੁਮਨ ਤਲਵਾਰ ਅਰਪੂ ਪੂਛੜਾ ਉਹਨੀਆਂ ਵੱਲ ਚਲੀ ਆਦਮੀ ਤੇ ਅੱਗੇ ਬੁੜੀ ਜੀਵਨ ਦਾ ਭੋਲਾ ਹੀ ਬੰਦੇ ਆ ਬਾਕੀ ਤਾਂ ਉਹਦਾ ਹੀ ਆ ਤਾਂ ਇੱਥੇ ਤੱਕ ਆਇਆ ਇੱਥੇ ਤੱਕ ਤਾਂ ਆਇਆ ਹੁਣ ਕੀ ਹੋਇਆ ਹੁਣ ਕਈ ਕਰੋੜ ਪੁਜਾਰੀ ਬਣ ਗਏ ਇੱਥੇ ਕੇ ਦੀ ਆਪਣੀ ਅਗਲ ਕੰਮ ਕਰਨ ਮਲਦੀ ਕੋਣ ਕਰ ਲਿਆ ਉਹਨਾਂ ਨੇ ਨਾ ਕੋਈ ਬੁੱਧਰ ਨਾ ਕੋਈ ਕਰਮ ਨਾ ਕੋਈ ਗ੍ਰੰਥਨਾ ਨਾ ਕੋਈ ਟੀਚਰ ਨਾ ਕੁਛ ਵੀ ਬਣਾਇਆ ਬਾਕੀ ਜੋ ਉਹਨਾਂ ਨੇ ਆਦਮੀ ਬਣਾਇਆ ਹੁਣ ਕੀ ਕਰ ਰਿਹਾ ਅੱਗੇ ਦਿੱਤੂ ਕਈ ਕੋਟ ਹੋਏ ਪੁਜਾਰੀ ਪੁਜਾਰੀ ਬਥੋਂ ਪੁੱਛੋਂ ਆਏ ਤੇ ਪੁੱਛਦੇ ਆਏ ਨੇ ਤਾਂ ਮਤਲਬ ਉਹ ਪੁਜਾਰੀ ਨੇ ਉਹ ਤਾਂ ਪੁਜਾਰੀ ਨੇ ਤਾਂ ਮਨ ਅਰਪਣ ਪੂਜਤਾ ਹੀ ਹੈ ਉਹ ਆ ਧੋਤ ਸਰੇਸ਼ੀ ਤਰਬ ਪੂਜਾਇਆ ਪਾਣਾ ਬਣ ਨਹੀਂ ਸਕਦਾ ਪੂਜਾ ਤਰਮਨ ਅਰਪਣ ਤੋਂ ਕੋਈ ਨਹੀਂ ਜਾ ਸਕਦਾ ਪਾਣਾ ਬੁੱਧਣ ਕੇ ਅੱਛਾ ਨਹੀਂ ਹੈ ਤਰਮਨ ਅਰਪਣ ਪੂਜਤਲਾ ਹੁਣ ਅੜੀ ਸਾ ਤਬਹੀ ਮੰਗਦਾ ਕਿੰਨੇ ਰੁਪਏ ਦੇ ਸਕਦਾ ਕਿ ਜੋ ਦੇ ਸਕਦਾ ਹੈ ਜਿਨੀ ਜ਼ਿਆਦਾ ਦੇ ਸਕਦਾ ਆਪੀ ਕੋੜੇ ਦੇ ਸਕਦਾ ਹੈ ਤਨਮਨ ਦੇ ਤਨਮਨ ਆਰਪੂ ਕੋਈ ਤਰ੍ਹਾਂ ਇਹ ਪੌੜੀ ਵੀ ਚੜੀ ਜਾਊਗੀ ਤਾਂ ਚੜੀ ਉਹ ਚੜੇ ਨਹੀਂ ਸਕਦਾ ਜਿਹੜੇ ਚੜੇ ਨੇ ਉਹਨਾਂ ਨੇ ਸਤ ਪੂਰੀ ਕੀਤੀ ਹੈ ਪਿੱਛੇ ਸਾਤੇ ਦਾ ਪੂਰੀ ਆਈ ਹੈ ਇਹ ਪੂਰੀ ਕਰੇ ਤੇ ਬਰੂ ਨਹੀਂ ਚੜ ਸਕਦਾ ਜੋੜ ਲਾ ਰਿਹਾ ਹੈ ਜੋੜ ਦਾ ਤਖਬੇ ਜੋੜਨ ਚ ਉਟੀ ਛੋਟੇ ਸੰਸਾਰ ਗੱਲ ਦਿੱਤਾ ਕੋਈ ਜੋੜਤੀ ਨਹੀਂ ਕੋਈ ਜੋੜ ਆਪਣੇ ਜੋੜ ਨਾਲ ਆਪਣੀ ਦੇਖ ਚੱਲਦਾ ਹੋਈ ਸਹੀ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਜੋਹਾਰੀ ਹਾਂ ਹਾਂ ਪੁਜਾਰੀ ਤਾਂ ਹੋਏ ਪਰ ਚਰਮਾਨਾ ਗੂਠੇ ਪੂਛੜਾ ਮਾਰੇ ਹੁੰਦੇ ਤਾਂ ਆਚਾਰ ਬਿਹਾਰੀ ਦੀ ਲੋੜ ਨਹੀਂ ਸੀ ਕੋਆ ਉਹ ਕੀ ਆਦਮੀ ਜਦਾ ਸ਼ੈਤਾਨੇ ਦਾ ਪੈਦਾ ਹੋਇਆ ਤਵਾਨ ਨੇ ਕਿ ਆਚਾਰ ਬਿਹਾਰੀ ਚਹੀ ਤੇ ਆਚਰਣ ਦੇ ਵਿੱਚ ਪੂਜਾ ਆਵੇ ਜੇ ਪੂਜਾ ਹੈ ਜੀ ਉਹਦਾ ਸਾਨੂੰ ਬੈਨੀਫਿਟ ਆਗਿਆ ਨਾਲ ਲੈਣਾ ਇਹ ਨਹੀਂ ਹੈ ਕਿ ਇਹ ਥੋੜਾ ਅ ਸੇਵਾ ਥੋੜੀ ਮੰਗਣਾ ਹੁੰਦਾ ਪਿਆ ਥੋੜੇ ਦੇ ਕੇ ਜਿਆਦਾ ਮੰਗਦਾ ਜਦੋਂ ਕੋਣ ਸੌਦਾ ਕਰੇਗਾ ਕਦੇ ਦਾ ਸੌਦਾ ਕਰੇ ਲੋਹਾਰੀ ਦਾ ਵਪਾਰੀ ਦੀ ਦੰਸ਼ੀਏ ਹਾਂ ਵਪਾਰੀ ਵਪਾਰੀ ਦੀ ਗੱਲ ਆਚਾਰ ਆਚਰਣ ਦੇ ਵਿੱਚ ਵਿਹਾਰ ਆਵੇ ਉਹਦਾ ਅਕਾਲ ਪੁਰਖ ਜੰਮਾ ਅਕਾਲ ਦੇ ਵਿੱਚ ਤਬਦੀਲੀ ਵਾਲਾ ਵਪਾਰ ਕਰੇ ਨਾ ਕਿ ਅੱਜ ਜਿਹੜਾ ਕਾਰੋਬਾਰ ਵਿੱਚ ਬਾਦੇ ਵਾਲਾ ਵਪਾਰ ਕਰੇ ਅਸੀਂ ਉਸ ਨੂੰ ਪੂਜਾ ਨੂੰ ਕਾਰੋਬਾਰ ਕਿਤੇ ਦੁਗਣੀ ਰਾ ਚੋਗਣੀ ਬਾਦੇ ਦੇ ਵਿੱਚ ਲਈ ਅਰਦਾਸ ਕਰਦੇ ਹਾਂ ਇਹ ਗੁਰਮਤਿ ਸਿਖਾਉਂਦੇ ਜੇ ਉਹ ਨੂੰ ਦੇ ਵਿੱਚ ਬਿਹਾਲ ਲੈਂਦੇ ਕਿ ਤੂੰ ਸਮਤ ਵਕਸੀ ਜਿਹੜੀ ਪੂਜਾ ਕੀਤੀ ਹੈ ਜੋ ਵੀ ਮੈਂ ਕੀਤਾ ਹੈ ਇਹਦੇ ਨਾਲ ਮਾਨੂੰ ਸਮਤ ਬਖਸ਼ੀ ਮੈਂ ਪਾਣਾ ਬੁੱਧੂ ਦਾ ਭਲ ਬਖਸ਼ੀ ਜੇ ਇਹ ਮੰਗੇ ਤੇ ਆਚਰਣ ਦਾ ਤਾਂ ਸ਼ਾਇਦ ਤਰਮ ਜਿਹੜਾ ਸੀ ਅਪੂਪੂਤੜ ਉੱਤ ਬੋਝਨ ਦਾ ਫੈਲਾ ਨਹੀਂ ਬੋਲ ਤੋਂ ਛਾੜੋ ਹੋ ਕੇ ਤਰਮ ਨਾਲ ਤੋਂ ਅਪੂਪੂਤੜ ਉੱਤ ਤਾਂ ਜਾ ਸਕਦਾ ਜੇ ਆਚਰਣ ਜਿਹੜਾ ਜਮਾ ਮੇਰਾ ਆਚਾਰ ਬਦਲੇ ਗੁਰਮਤ ਦਾ ਚੜ੍ਹਨ ਹੋਵੇ ਗੁਰਪੁਤੀ ਆਚਾਰ ਮੇਰਾ ਬਦਲੇ ਜੋ ਮੈਂ ਕਰ ਰਹਿਣਾ ਪੂਜਾ ਕਰ ਰਹਿਣਾ ਜੋ ਵੀ ਮੇ ਤੋਂ ਹੋਵੇ ਜੇ ਤਾਂ ਆਚਾਰ ਵਿਹਾਰ ਦੇ ਵਿੱਚ ਰੂ ਪੂਜਾ ਰੂ ਜਿਸ ਮਤਲਬ ਜੋ ਸਾਡੀ ਪੂਜਾ ਚ ਬਲੇ ਰੈਡੀ ਆਚਾਰ ਵਿਹਾਰ ਦੇ ਵਿੱਚ ਲਾਵੇ ਫਿਰ ਤਾਂ ਠੀਕ ਹੈ ਜੇ ਫਿਰ ਦੇਦੇ ਮੁਕੇ ਸੈਸਾ ਕੋ ਨੂੰ ਸੋਵ ਕਰੇ ਸੰਸਾਰ ਦੇ ਇਦਾਂ ਕਰੇ ਵਿਖੇ ਲੱਗਿਆ ਪਰ ਉਹਦਾ ਕਹੇ ਦੇ ਤੇ ਹਜ਼ਾਰਾ ਕੋਨਾ ਜਿਆਦਾ ਸੁਕਦੇ ਨੇ ਇਹ ਚਾਰ ਬਹਿਰ ਨਹੀਂ ਆ ਇਹ ਤਾਂ ਬੇ ਉਧਰ ਕੀ ਸੀ ਕੋ ਨਾਂ ਤਾਂ ਦੇਦੇ ਮੁਨਤਾ ਸੈਸਾ ਕੋ ਨੂੰ ਕਰੇ ਸੰਸਾਰ ਬੜੇ ਬੜੇ ਦੱਤੀ ਇਹਦਾ ਮਸਲਾ ਹੈ ਜਿਹੜੇ ਦਾਨੀ ਮੰਨਦੇ ਨੇ ਉਹਨਾਂ ਨੂੰ ਗੁਰਸਹਾऱ्यांना ਵਿੱਚ ਉਹ ਸੰਸਾਰੀ ਆਦਮੀ ਨੇ ਬਖਤਵੀਆਂ ਸੰਸਾਰ ਤੋਂ ਮੁਕ ਕਰ ਸਕਦਾ ਗੁਰਮੁਖ 소ਫ ਨਹੀਂ ਕਰ ਸਕਦਾ ਤੋਂ ਆਚਾਰ ਵਿਆਹ ਕਿਵੇਂ ਬਦਲਦੇ ਜੇ ਤੁਸੀਂ ਆਚਾਰ ਵਿਆਹ ਕਿਵੇਂ ਬਦਲਦੇ ਤਾਂ ਉਹਨੇ ਹੰਕਾਰ ਦੇ ਬਦਲ ਜਾਣਾ ਫਿਰ ਉਹਨੇ ਹਮਝ ਬਦਲ ਜਾਣਾ ਨੇਤਾ ਬਦਲੇ ਆਚਾਰ ਵਿਵਹਾਰ ਚ ਮੇਰਾ ਆਚਰਨ ਗੁਰਮਤਾਰਾ ਹੋਵੇ ਤੇਦਾ ਅਸਰ ਪਵੇ ਮੇਰੀ ਹੁద్ధి ਤੇਦਾ ਅਸਰ ਪਵੇ ਮੇਰੇ ਮਨਪਲ ਤੇਦਾ ਅਸਰ ਪਵੇ ਆਚਾਰ ਵਿਵਹਾਰ ਦੀ ਤਬਦੀਲੀ ਆਵੇ ਮੇਰੇ ਫਿਰ ਤਾਂ ਉਹਦਾ ਫਾਇਦਾ ਪੂਜਾਦਾ ਫਿਰ ਤਾਂ ਮੰਨਾਰ ਬੰਬੂ ਉਜੜਾ ਉੱਤਕ ਜਰ ਹੋਊਗਾ ਹਾਲੇ ਜਾਇ ਥੋੜ੍ਹੀ ਨੰਤਰ ਪੜਨਾ ਪੂਜਾ ਫਿਰ ਉਹਦਾ ਬੈਂਫਿਟ ਕਾਲੇ ਵਾਸਤੇ ਲੈਂਦਾ ਫਿਰ ਉਹ ਗੱਲ ਬਦਲੂਗਾ ਤੇ ਕਦੀ ਪਾਊਗਾ ਪੂਆ ਤਨਮਨ ਅਰਪਨ ਪੂਚੜ ਉਹ ਬਰ ਨੂੰ ਕਦੀ ਜੀ ਲੋਨੂਗਾ ਫਿਰ ਉਹ ਤੇ ਆਚਾਰ ਵਿਹਾਰ ਬਦਲਦਾ ਉਹਦਾ ਫਿਰ ਬਦਲ ਆ ਜੂ ਹੋ ਜੀ ਕੋਟ ਪੈ ਤੀਰਥ ਵਾਸੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਹਦਾ ਸੀ ਇਦੋਂ ਵਹਾਂ ਜਾ ਚਲਾ ਜਾਊ ਹੋ ਆਚਾਰ ਵਿਹਾਰੀ ਫਿਰ ਉਹ ਜੀ ਦਬਾ ਜੀ ਗਾ ਗੇ ਸਾਡੇ ਗੇ ਤੁਸੀਂ ਪਿਆਗਲੀ ਸਟੇਜ ਹੈ ਪਹਿਲੀ ਸਟੇਜ ਹੈ ਪੁਜਾਰੀ ਦੂਜੀ ਸਟੇਜ ਆਚਾਰੀ ਆਦਿ ਸਟੇਜ ਤੀਜਾ ਪਹਿਲਾ ਉਹ ਜੀ ਪਹਿਲਾ ਉਹ ਜੀ ਮਤਸਾ ਮਹਾਦੇਵ ਬਤਾ ਪਹਿਲਾ ਉਸ ਲੱਗਦਾ ਨਾ ਪਤਾ ਚੇਗਲੀ ਸਟੇਜ ਹੈ ਕਿਉਂਕਿ ਆਚਾਰ ਵਿਹਾਰੀਆ ਤਾਂ ਫਿਰ 380 ਪਰੇ ਜਦ ਮੋ ਗਿਆ ਹਾਂ ਕਈ ਕੋਟ ਬਨ ਭਨਵੇਂ ਉਦਾਸੀ ਇਹ ਤਾਂ ਹੋ ਗਿਆ ਤੀਰਥਵਾਸੀ ਜਾਂ ਤਾਂ ਜੰਗਲ ਚਲੇ ਜਾਂ ਜਾਂ ਛੱਡ ਕੇ ਕਾਰੇ ਜੰਗਲ ਚ ਜਾ ਕਈ ਕੋਟ ਬਨ ਭਨਵੇਂ ਉਦਾਸੀ ਜਾਂ ਫਿਰ ਜੰਗਲ ਚਲੇ ਜਾਂ ਉਹ ਚਲੇ ਜਾਂ ਤਿਹਰ ਦਬਤੀ ਚ ਜਾਂ ਕਈ ਕੋਡ ਵੇਦ ਕੇ ਸਰੋਤੇ ਕਈ ਕੋਡ ਵੇਦ ਹੀ ਪਸਤ੍ਰੋਤੇ ਵੇਦ ਹੀ ਪੜਨਾ ਵੇਦ ਹੀ ਸੁਣਾ ਵੇਦ ਹੀ ਪੜਨਾ ਵੇਦ ਹੀ ਸੁਣਾ ਉਹ ਕਰੇ ਹੁੰਦੇ ਨੇ ਜਾਇ ਤੇਰੀ ਫਤਿਹ ਤੇ ਜਾਵੇ ਜ਼ਰੂਰੀ ਜਨ ਉਹ ਤਾਂ ਕਰੀ ਵੇਦ ਕੇ ਸੁਰੋਤੇ ਆ ਗੁਰਵਾਣੇ ਪੜਨੇ ਜਾਂ ਸੰਕੀਰ ਵਿਚਾਰਦਿਆਂ ਜੋ ਵੇਦੇ ਹੈ ਵੇਦ ਕੇ ਸੁਰੋਤੇ ਵੇਦ ਕੇ ਸੁਰੋਤੇ ਗਿਆਨ ਕੇ ਸੁਰੋਤੇ ਹੁੰਦਾ ਨਹੀਂ ਬਲਕਿ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸੁਰੋਤੇ ਕਈ ਕੋਟ ਤਪੀਸ਼ਰ ਹੋਤੇ ਉਹ ਜਿਹੜੇ ਇਹ ਨਾ ਫੱਡਦੇ ਚੱਲੇ ਕੀ ਤਾਂ ਇਹ ਲੋਗ ਰਹਿੰਦੇ ਨੇ ਮਨ ਦਾ ਆਪਣਾ ਤੀਰ ਹੁੰਦੇ ਗਰਗੋਵਾ ਨਮਸ ਕੋ ਗਰਗੋਵਾ ਨਾ ਰਿਹਾ ਕਰਗੋਵਾ ਨਮਸ ਤੇ ਹੁਟ ਨਹੀਂ ਤਾਂ ਸਹੀ ਪਰ ਉਹ ਗੱਲ ਨਹੀਂ ਕਿਹ ਨਾਲੀ ਗੱਲ ਨਹੀਂ ਉਹ ਦੋਏ ਫੇਲ ਹੋ ਜਾਣਾ ਨੇ ਅਵੇਦ ਕੇ ਸੋਟੀ ਠੀਂ ਗਰਣਾ ਨੇ ਉਹ ਤੀਰ ਬਾਹਰ ਲਾਉਣ ਦੇ ਚਰਨ ਆਲੇ ਬਾਹਰ ਉਹ ਤੇ ਬਾਹਰ ਟੋੜ ਉਹ ਦੋਏ ਪਰ हां तो दो क्या लगे पर भाई कई कोट बांध भरमे उदासी हां कई कोट बेद के श्रोते कई कोट कपीसर होते कई कोट बेद के श्रोते बेद के श्रोते ने ज्ञान सुनदा रे वो तो अगली शेष की है कपीसर होते फिर मारते ਕਾਬਾ ਮੰਨੂ ਕੱਪੂ ਕਰਨਾ ਤਪੀਸਰ ਉਹ ਆਹ ਤਪ ਕਰਨਾ ਦੀ ਵਾਰ ਉਹ ਤਾਂ ਜਿਹੜੇ ਬਨ ਕਰਨਾ ਮਾਂ ਚੂੜੀਆਂ ਕੈਟ ਕਰਦੀਆਂ ਅਲਣਾ-ਵਲਣਾ ਅੱਛੇ ਥਲੇ ਜ਼ਬਰਦਸਤੀ ਬੁਨਉਣਾ ਮੰਨੂ ਕੁਰਬਾਨੀ ਨੂੰ ਮਨਨ ਦਾ ਕਾ ਕਰਨਾ ज्ञान रतन मन में जिए ज्ञान जी मन में जिए ज्ञान गुरुजन आले 11 रतन ते नाल दी मान मान जाना मान जाना कहूं जब फड़के तगड़े आसन फड़के मान जंदा क जे कोई चीज माननी होवे हां जी कई ਇਦੋਂ ਗਾਹਾਂ ਫੇਰ ਹਸਬਤਿਆ ਨਹੀਂ ਹੋਗੇ ਹੋਗੇ ਨਾ ਜੇ ਮਨ ਮੰਨੇਗਾ ਫੇਰ ਆਦਮ ਤੇ ਅੰਤ ਲਾ ਦੇਈ ਤੇਈ ਕੋਟ ਆਸਬਤ ਅੰਤ ਕਰ ਤੇਈ ਕੋਟ ਦੇ ਸੋਤੇ ਉਹਨਾਂ ਜਿਹੜੇ ਚਪੀਸਰ ਹੁੰਦੇ ਇਹ ਮਾਨੂਬ ਤੇ ਕੁਰਬਾਨੀ ਫੇਰ ਤੇ ਅੰਤ ਆ ਤੱਕ ਕੋਟ ਉਹ ਰਹਿ ਕੇ ਫੇਰ ਨਹੀਂ ਗੱਲ ਬਣਦੀ ਤੇ ਕੱਲੇ ਸੋਤੇ ਨੇ ਫੇਰ ਨਹੀਂ ਗੱਲ ਬਣਦੀ ਤੇ ਖੋਤੇ ਰਹਿ ਕੇ ਐਸੋ ਨੋ ਤਾਂ ਕੋਈ ਨਹੀਂ। ਇਹੋ ਕਿਸੇ ਨੂੰ ਆਹ ਜਦੋਂ ਫਿਰ ਕੋ ਮਾਦਿਨਾ ਗਾਉਂਦੇ ਆਪਣੀ ਲੱਭੀ। ਕਈ ਕੋਟ ਅਦਮਤੇ ਆਉਂਦੇ ਰਹੇ। ਅਦਮਤੇ ਹੀ ਕਬਾਦੀ ਸੁਣਦਾ ਜ਼ਰੂਰ। ਹੁਣ ਤਾਂ ਡੰਡਾ ਪੈਂਦਾ ਤਾਂ ਹੁੰਦਾ। ਆਤਮ ਤੇ ਕਈ ਕੋਟ ਉਹਨਾਂ ਦੇ ਵਿੱਚੋਂ ਫਿਰ ਆਪ ਸੁਚਾਨਤਾ ਦੇ ਹਾਲੇ ਸੁਣਦੇ। ਜਿਹੜੇ ਤਪੀਸਰਾਂ ਤੋਂ ਤੇ ਤਪੀਸਰਾਂ ਤੇ ਤਪੇ ਤਪੀਸਰ ਆਇਆ। ਕੱਲੇ ਤਪਿਸਰਾ ਤਪੇ ਤਿਸਰਾ ਆ ਹੇੇ ਕੋਡ ਕਵੀ ਕਾਹੋ ਵਿਚਾਰੇ ਇਦੋਂ ਵਿੱਚ ਇਸ ਉਸਕੇ ਦੇ ਵਿੱਚ ਕਵਤਾ ਲਿਖਣ ਵਾਲੇ ਜੰਨੇ ਨੇ ਉਹ ਜਿਹੜੇ ਲਿਖਿਆ ਉਹਨਾਂ ਨੇ ਬ੍ਰਹਮਾ ਦੇ ਉਪੋਗਤਾਰ ਬ੍ਰਹਮਾ ਦੇ ਉਪੋਗਤਾਰ ਆ ਜਾਂਦੇ ਨੇ ਅਕਾਲੀ ਵਰਗੇ ਇੱਥੇ ਫਿਰ ਕਵੀ ਰਾਏ ਵਰਗੇ ਇੱਥੇ ਆ ਜਾਂਦੇ ਨੇ ਫਿਰ ਕਵੀ ਕਵਤਾ ਫਿਰ ਉਹਨਾਂ ਨੂੰ ਭੁੱਲ ਨਾਲ ਜਾਂਦੀ ਹੈ ਕੋਈ ਏ ਜੀ ਦਾ ਲੋਕ ਜਿਹੜੀਆਂ ਪਰੰਪਰਾ ਦਾ ਜਿਹੜਾ ਧਰਮ ਹੈ ਉਹਦੀਆਂ ਕਮੀਆਂ ਜਾਹਰ ਕਰਨ ਨਾਲ ਜਾਂਦਾ ਕਵੀ ਕਾਗੋ ਵਿਚਾਰੇ ਉਹ ਕਪਟਾ ਹੀ ਆ ਪਰ ਉਹ ਉਪੋਕタル ਨਾ ਮਾਣੇ ਨਹੀਂ ਆ ਹਾਂ ਕਈ ਕੋਟ ਨਵਤਨ ਨਾਮ ਤੇ ਕਈ ਕੋਟ ਨਾਮ ਤਾਂ ਕਈ ਦ ਨਮੇ ਜਬ ਨਾਮ ਅੰਦਰ ਗਿਆਨ ਪੈਦਾ ਹੋਇਆ ਜਿਨ੍ਹਾਂ ਦੇ ਨਵਤਨ ਨਾਵ ਯਾਦ ਕਰੋ ਦੋ ਸਤਗੁਰੂ ਮੈਂ ਨੌ ਤਨ ਕਿਰਾਂ ਸਮਝ ਮੈਂ ਆਜੇ ਲੋ ਨੌ ਤਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਤਲਬ ਹੈ ਜਨਮ ਪਦਾਰਥ ਕਿਰਤਾਂ ਸਾਰੇ ਉਹਗੇ ਉੱਗੇ ਹੋਣੇ ਜਿਹੜੇ ਤਾਂ ਹੈਗੇ ਨੇ ਇੱਕ ਉਹਨੇ ਆਤਮ ਤੇ ਧਾਰੀ ਆਤਮ ਧਾਰੀ ਜਿਹੜੇ ਉੱਗਿਆ ਹੁੰਦੇ ਨੇ ਉਹ ਫਿਰ ਸ਼ਬਦ ਗੁਰੂਆਂ ਨਾਲ ਜੁੜ ਜਾਂਦੇ ਨੇ ਉਹ ਕਿਨਾਂ ਉਹ ਨਾਮ ਤਾਂ ਚੇਲੇ ਬਣਦੇ ਨਹੀਂ ਕੋਈ ਨਾਮ ਤਾਂ ਨਹੀਂ ਆਉਂਦਾ ਨਾਮ ਤੇ ਆਉਂਦਾ ਨਾ ਪਰ ਤਾਂ ਨਵੇਂ શરીਰ ਨਾਲ ਨਾਮ ਤੇ ਜੁੜ ਜਾਂਦਾ ਆ ਬਾਹਰਲਾ ਸ਼ਰੀਰ ਨਹੀਂ ਆਇਆ ਨਾਮ ਉਹਨਾਂ ਦਾ ਜਦੋਂ ਅੰਦਰ ਸੁਰਤ ਪੈਦਾ ਹੋਈ ਹੈ ਸੋ ਤੇ ਸ਼ਬਦਾਂ ਮੇਲ ਕਰਨਾ ਨਾ ਲਿtion ਜਾਂ ਤੁਦੋ ਨਾ ਨਾਮ ਜੇ ਪਹਿਲਾ ਕੰਨਾ ਨਾਲ ਸੁਤੀ ਉਦ ਦਿੱਤੀ ਉਹ ਬਿਨਾ ਕੰਨ ਨਹੀਂ ਹੈ ਉਹ ਜਿਹੜਾ ਨਾਮ ਨਾ ਜਰੀਦਾ ਉਹ ਉੱਤਮਾ ਤੋਂ ਬਿਨਾ ਹੀ ਹੋਣਾ ਚਾਹੀਦਾ ਉਹ ਧਿਆਨ ਉਹ ਤੋਂ ਅਪਤ ਨਾਮ ਪਿਆ ਉਹ ਉਹਨਾਂ ਤੇ ਲੈ ਕੇ ਵੇਦ ਦੇ ਸ्रोतਾਂ ਤੋਂ ਲੈ ਕੇ 34 ਸੇ ਤੇ ਆ ਕੇ ਬੈਠ ਕੇ ਸ्रोतੇ ਤੀਸਰ ਹੋਤੇ ਪੁਲੀਚਰ ਉਹ ਹੈਗਾ ਆਤਮ ਤੇ ਅੰਤਾਰ ਆਤਮ ਕੇ ਯਾ ਸਭ ਕੁਝ ਬਚਾਰਾ ਆਤਮ ਤੇ ਅੰਤਾਰਾਂ ਦਾ ਵੀ ਗਾਉਂ ਜਾਂਦਾ ਨਾ ਕੋਈ ਗੱਲ ਆ ਨਾਮ ਦਾ ਜੋ ਜੋ ਤੁਸੀਂ ਸੇ ਤੇ ਆ ਗਏ ਜੀ ਕਰਦੇ ਗਾਲ ਤਰ੍ਹਾਂ ਬਾਬਾ ਇਹ ਨਾਮ ਤੇ ਵਾਲੇ ਨੇ ਅੰਤ ਕਰਦੇ ਗਾਲੀ ਬੋਲਦੇ ਦੂਏ ਸਾਰੇ ਅੰਤ ਬੋਲਦੇ ਨਾਲ ਕਰ ਸਕੇ ਤਾਂ ਉਤਰਾਂ ਪਾਵੇਂ ਹੰਤਪੋਣ ਵਾਲੇ ਕੋਲ ਨਹੀਂ ਇਹ ਹੰਤਪੋਣ ਵਾਲੇ ਕੋਲ ਜਾਂਦੇ ਦੂਰੇ ਹੰਤਪੋਣ ਵਾਲੇ ਕੋਲ ਜਾਂਦੇ ਹੰਤਪੋਣ ਦੂਰ ਪਾਉਂਦੇ ਨਹੀਂ ਆਇਆ ਹੰਤਪੋਣ ਵਾਲੇ ਇਹ ਹੰਤਪੋਣ ਵਾਲੇ ਦੀ ਜੇ ਆਦਨ ਕੜਿਆ ਨੇ ਤਾਂ ਆਦਨ ਕੜਿਆ ਨੇ ਹੰਤਪੋਣ ਵਾਲੇ ਤੇ ਸਦਾ ਨਾ ਬੀਤ ਸੇ ਚੱਲ ਗਏ ਇੱਥੇ ਆ ਫੇਰ ਨਾ